ਦੱਖਣੇ ਮਹੱਲਾ ਪੰਜਵਾਂ ਜਿਨਾ ਪਿੱਛੇ ਹੋ ਗਈ ਸੇ ਮੈਂ ਪਿੱਛੇ ਵੀ ਰਵਿਆਸ ਜਿੰਨਾ ਕੀ ਮੈਂ ਆਸੜੀ ਕਿੰਨਾ ਮਹੰਜੀ ਆਸ ਹੁਣ ਇਹ ਇੱਕ ਦੂਜੇ ਦੇ ਪਿੱਛੇ ਕਿਵੇਂ ਹੋ ਗਏ ਇਹ ਤਾਂ ਸਾਰੀ ਉਹ ਗੜਬੜ ਹੈ ਭਾਸ਼ਾ ਦੀ ਜੇ ਬੰਨ ਇਹਦਾ ਅਰਥ ਨਹੀਂ ਹੋ ਸਕਦਾ ਜਿੰਨਾ ਬੱਛੇ ਹੋਣ ਗਏ ਜਲਦੀ ਕਹਦਾ ਜੇ ਲਾਲਟਣ ਚੱਕ ਲੈਂਦਾ ਲਾਈਟ ਨਾਲੇ ਚਲੀ ਜਾਂਦੀ ਹੈ ਜਦ ਤੱਕ ਸੂਰਜ ਗਿਆ ਤਾਂ ਪਿੱਛੇ ਚਲੀ ਗਈ ਜੇ ਨਾਲ ਪਿੱਛੇ ਹੋਂ ਗਈ ਸੂਰਜ ਤੱਕ ਬੋਲਦੀ ਹੈ ਬੁੱਧ ਬੋਲਦੀ ਹੈ ਜਦ ਜਿਹੜਾ ਹੋਂ ਵਿਚ ਆਇਆ ਸੀ ਨਾ ਜਦ ਹੱਸ ਗਿਆ ਬੁੱਧ ਕਹਿੰਦੀ ਮੈਂ ਨਾਲੇ ਚਲੀ ਗਈ ਪਿੱਛੇ ਚਲੀ ਗਈ ਪਾਰੰਜਾ ਮਹਿਮੂਦਾ ਅੱਗਾ ਕੀਤਾ ਹੁਣ ਸਭ ਵੀ ਮੇਰੇ ਪਿੱਛੇ ਹੀ ਜੋ ਮੈਂ ਬੋਲ ਆ ਜੋ ਮੈਂ ਕੀਤਾ ਜੋ ਮੈਂ ਸੋਚਿਆ ਜੋ ਮੈਂ ਦੇਖਿਆ ਜੋ ਮੈਂ ਵਰਤੇਆ ਮੇਰੇ ਪਿੱਛੇ ਵੀ ਉਹੀ ਰਵਿਆ ਹੋਇਆ ਸੀ ਉਸੇ ਦੀ ਰੋਸ਼ਨੀ ਸੀ ਮੇਰੇ ਕੋਲ ਮੇਰਾ ਆਪਣਾ ਮੇਰੇ ਦੀ ਕੁਛ ਨਹੀਂ ਸੀ ਮੈਂ ਪਿੱਛੇ ਮੇਰੇ ਪਿੱਛੇ ਵੀ ਉਹੀ ਰਵਿਆ ਹੋਇਆ ਸੀ ਉਹਦੀ ਰੋਸ਼ਨੀ ਸੀ ਉਹਦੀ ਜੋਤ ਸੀ ਇੱਕ ਵਾਰ ਹੁੰਦਾ ਜੀ ਰਵਿਆਸ ਅਖਰ ਪੂਰੇ ਪੁੱਤੀ ਸਾਹਿਬ ਚ ਸਾਡਾ ਰਵਿਆ ਹੋਇਆ ਰਹਿ ਠੀਕ ਹੈ ਭਾਵ ਹੈ ਕਿ ਇਹ ਚਿੱਤ ਹੋਏਗਾ ਜੀ ਹਾਂ ਜੀ ਅਰਥ ਹੈ ਜੀ ਇੰਗਲਿਸ਼ ਵਾਲੇ ਮੈਂ ਦੇ ਹੂ ਮਾਈ ਫਾਲੋਡ ਦੇ ਟੂ ਨਾਓ ਫਾਲੋ ਇਨ ਮਾਈ ਫੁੱਟਸਟੈਪਸ ਅਨ ਨਹੀਂ ਪਤਾ ਵੀ ਕੌਣ ਅੱਗੇ ਹੈ ਕੌਣ ਪਿੱਛੇ ਹੈ ਜਿਹੜੇ ਸਿਰਫ ਸਰਲ ਹੋਏ ਹੋਏ ਆਂ ਜਿਨ੍ਹਾਂ ਦੇ ਮਗਰ ਮੈਂ ਤੁਰਦੀ ਸਾਂ ਉਹ ਵੀ ਹੁਣ ਮੇਰੇ ਕਦਮਾਂ ਮਗਰ ਤੁਰਦੇ ਹਨ ਅੱਛਾ ਜੀ ਹੁਣ ਫਰੀਦਕੋਟ ਵਾਲੇ ਟੀਕੇ ਵਾਲੇ ਕੀ ਕਹਿੰਦੇ ਆ ਜੀ ਜਿਨ ਪਦਾਰਥੋਂ ਕੇ ਪਿੱਛੇ ਮੈਂ ਫਿਰਤੀ ਥੀ ਸੋ ਅਬ ਮੇਰੇ ਪਿੱਛੇ ਰਵਿਆਸ ਫਿਰਤੇ ਹਨ ਇਹ ਫਲ ਪਰਮੇਸ਼ਰ ਪ੍ਰਾਇਣ ਹੋਣੇ ਕਾ ਹੈ ਮਾਪਾ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਪੜ੍ਹ ਲੈਣੇ ਆ ਜੀ ਮਾਰੂ ਰਾਗ ਹੈ ਕਿਤੇ ਸਭ ਦਾ ਨਾਸ ਹੋਇਆ ਹੈ ਹਾਂਜੀ ਚਲੋ ਜੀ ਮਾਇਆ ਦਾ ਅਜਬ ਪ੍ਰਭਾਵ ਹੈ ਸਭ ਮਾਇਆ ਦੀ ਖਾਤਰ ਭਟਕਦੇ ਫਿਰਦੇ ਹਨ ਮਾਇਆ ਵਾਸਤੇ ਜਿਨ੍ਹਾਂ ਬੰਦਿਆਂ ਦੇ ਪਿੱਛੇ ਮੈਂ ਜਾਂਦਾ ਹਾਂ ਜਿਨ੍ਹਾਂ ਦੀ ਮਹਤਾਜੀ ਮੈਂ ਕੱਢਦਾ ਹਾਂ ਜਦੋਂ ਮੈਂ ਉਹਨਾਂ ਵੱਲ ਤੱਕਦਾ ਹਾਂ ਤਾਂ ਉਹ ਵੀ ਮੇਰੇ ਪਿੱਛੇ ਪਿੱਛੇ ਤੁਰੇ ਫਿਰਦੇ ਹਨ ਸਰਬਤਾ ਦੀ ਜਿਗਰੇ ਜਿਨ੍ਹਾਂ ਦੀ ਸਹਾਇਤਾ ਦੀ ਮੈਂ ਆਸ ਰੱਖੀ ਫਿਰਦਾ ਹਾਂ ਉਹ ਮੈਥੋਂ ਆਸ ਬਣਾਈ ਬੈਠੇ ਹਨ ਇਹ ਪੂਰੇ ਸ਼ਲੋਕ ਦੇ ਅਰਥ ਹੈ ਜਿਨ੍ਹਾਂ ਪਿੱਛੇ ਹੋ ਗਈ ਛੇਵੇਂ ਪਿੱਛੇ ਵੀ ਰਵਿਆਸ ਜਿਨ੍ਹਾਂ ਕੀ ਮੈਂ ਆਸ ਜਦ ਆ ਬੱਕੇ ਮੈਂ ਗਈ ਸੀ ਸ੍ਰੀ ਛੱਡ ਕੇ ਪੀਰ ਛੱਡਿਆ ਸੀ ਉਹਦੇ ਨਾਲੇ ਰੋਸ਼ਨੀ ਨਾਲੇ ਚਲੀ ਗਈ ਸੀ ਉਹ ਐਸ ਵਕਤੋ ਮੇਰੇ ਪਿੱਛੇ ਰਵਿਆ ਹੋਇਆ ਉਸੇ ਦੀ ਰੋਸ਼ਨੀ ਅੱਜ ਵੀ ਉਸੇ ਦੀ ਰੋਸ਼ਨੀ ਆ ਅੱਜ ਵੀ ਉਸੇ ਦੀ ਸ਼ਕਤੀ ਮੇਰੇ 'ਚ ਕੰਮ ਕਰਦੀ ਹੈ ਰਵੀ ਹੋਈ ਹੈ ਧੁੱਪ ਵਿੱਚ ਸੂਰਜ ਦੀ ਰੋਸ਼ਨੀ ਹੁੰਦੀ ਹੈ ਸੂਰਜ ਦੀ ਸ਼ਕਤੀ ਹੁੰਦੀ ਹੈ ਸੂਰਜ ਦੀ ਲਾਈਟ ਨੂੰ ਇਸ ਕਰਕੇ ਰਵੀ ਕਹਿੰਦੇ ਨੇ ਸੂਰਜ ਨੂੰ ਰਵੀ ਪਰ ਆ ਜਿਹੜਾ ਹੈ ਰਵੀ ਵਾਸਤੇ ਆਇਆ ਹੋਇਆ ਹੈ ਜੇ ਰੱਬ ਇਹ ਸਾਥੀ ਰਵੀ ਕਿਹਾ ਹੈ ਰੱਬ ਬੁੱਧੀ ਕਹਿੰਦੀ ਆ ਉਸ ਦੀ ਸ਼ਕਤੀ ਆ ਬੁੱਧੀ ਰੋਸ਼ਨੀ ਆ ਉਸ ਦੀ ਸ਼ਕਤੀਆਂ ਉਹ ਮੇਰੇ ਪਿੱਛੇ ਵੀ ਹੈ ਹੁਣ ਖੜਾ ਕਿਤੇ ਪਿੱਛੇ ਨੂੰ ਗਈ ਸੀ ਆ ਜੀ ਦੇ ਪਿੱਛੇ ਲਾ ਕੇ ਲੱਕੇ ਨਾਲ ਕੰਮ ਕਰਦੀ ਹੋ। ਬੁਲਬੀਓ ਦੀ ਮਰਜ਼ੀ ਹੁੰਦੀ ਹੈ ਤਾਂ ਹੀ ਕੰਮ ਕਰਦੀ ਹੈ। ਅੰਦਲੇ ਦੀ ਬੁਝੂਰੀ ਬੇਨਾਂ ਦਾ ਕਦੇ ਨਹੀਂ ਸਕਦੀ ਕੋਈ ਕੰਮ। ਹਾਂ ਜੀ। ਆ ਨਾਲੇ ਸਾਹਿਬ ਸਿੰਘ ਨੇ ਗਈ ਦੀ ਅਰਥ ਨਹੀਂ ਕੀਤੀ ਉਹਨਾਂ ਨੇ ਹੌ ਮੈਂ ਤੋਂ ਇਹਨੂੰ ਪੁਰਸ਼ਵਾਚਕ ਬਣਾ ਲਿਆ ਜੀ। ਆਹੋ ਜਨਾ ਬੰਦਿਆਂ ਦੇ ਪਿੱਛੇ ਮੈਂ ਜਾਂਦਾ ਹਾਂ ਜਦ ਕਿ ਹੈ ਜਿੰਨਾ ਪਿੱਛੇ ਹਾਂ ਗਈ। ਇਹ ਸਭ ਲਈ ਵਿਚਾਰ ਨਹੀਂ ਹੈ ਤੇ ਬ੍ਰਹਮਚਾਰ ਹੈ ਬ੍ਰਹਮਚਾਰ ਨੂੰ ਬ੍ਰਹਮਚਾਰੇ ਰੱਖਿਆ ਜਾਊਗਾ ਉਹ ਹੋਰ ਬਾਜ਼ਾਰ 'ਚ ਫਿਰਦਾ ਹੈ ਉਹ ਬਾਜ਼ਾਰ ਇਹ ਜਿਹੜੇ ਬਾਜ਼ਾਰ ਕੇ ਅਰਥ ਨੇ ਉਹ ਬਾਜ਼ਾਰ ਤਾਂ ਵਿਦਵਾਨਾਂ ਦੇਖਿਆ ਹੀ ਨਹੀਂ ਬੜੇ ਹੀ ਉਹ ਬਾਜ਼ਾਰ ਤਾਂ ਬੜਦੇ ਹੀ ਨਹੀਂ ਹਾਂਜੀ ਜਿੰਨਾ ਕੀ ਮੈਂ ਆਸ ਰਹੀ ਤੇਨਾ ਆਸ ਜਿਨ੍ਹਾਂ ਦੀ ਮੈਂ ਆਸ ਰੱਖਦੀ ਆ ਜਿਨ੍ਹਾਂ ਦਾ ਅਸਰਾ ਮੈਨੂੰ ਹੈ ਉਹ ਵੀ ਮੇਰੇ ਤੇ ਆਸ ਰੱਖਦੇ ਨੇ ਕਿ ਸੰਸਾਰ ਜਾ ਕੇ ਕਰੇ ਕਮਾ ਕੇ ਲਿਆਵੇ ਗਿਆਨ ਹਾਸਲ ਕਰੇ ਤਤ ਦਾ ਗਿਆਨ ਭੋਜਨ ਨੂੰ ਜਿਹੜਾ ਸਾਹ ਲੈ ਰਿਹਾ ਉਹਦੀ ਸੇਵਾ ਕਰੇ ਗੁਰਤੀ ਸੇਵਾ ਕਰੇ ਉਹ ਗੁਰਮੀ ਵੀ ਸਤਗੁਰ ਦੀ ਬਾਣ ਚ ਆਸਦੇ ਆ ਸਤਗੁਰ ਮੈਂ ਮਰ ਤੋਂ ਚਾਹਾਂਗਾ ਸੇਵਾ ਸਤਗੁਰ ਦੀ ਸੇਵਾ ਸਫਲ ਹੈ ਜੇ ਕੋ ਕਰੇ ਜਿੱਤ ਉਹ ਵੀ ਚਾਹਦਾ ਗਿਆਨ ਪਹੁੰਚਣ ਬਿੱਦੂ ਲਿਆ ਕੇ ਦਵੇ ਉਹ ਕਿ ਦੁਆਸ ਰੱਖਦਾ ਮੈਂ ਉਹਦੇ ਅਸਰੇ ਆ ਕਿਉਂ ਬੁੱਧੀ ਬੋਲ ਰਹੀ ਐ ਤੇ ਰਵਿਆਸ ਜੋ ਹੈ ਉਹ ਪੁਰਸ਼ਵਾਚਕ ਹੈ ਸ਼ਬਦ ਹੋਏਗਾ ਠੀਕ ਐ ਪ੍ਰਥਮੇ ਨਾਨਕ ਚੰਦ ਇਦਾ ਮਤਲਬ ਚੰਦ ਵਾਲਾ ਗਿਆਨ ਔਰ ਸੂਰਜ ਦੀ ਗੱਲ ਚੱਲਦੀ ਹੈ ਗੁਰਬਾਣੀ ਚ ਹਾਂਜੀ ਹਾਂਜੀ ਠੀਕ ਐ ਜੀ ਮਹੱਲਾ ਪੰਜਵਾਂ ਗਿੱਲੀ ਗਿੱਲੀ ਰੋੜੜੀ ਭੌਂਦੀ ਪਵ ਪਵ ਆਏ जो बैठे से फाथियां उभरे भाग मथाए आई ए पाब सादा जे पौदी पौंदी पौंदी जेडी शरीर रूपी इक टेटी टे टेटी हुदी जानवर कीड़ा ओ गोहे दा गोल गोल कर बना लंदा ਗੋਲੀ ਓਨੁ ਰੋਡ ਕੇ ਲੈ ਕੇ ਜਾਂਦਾ ਤੇ ਰਿੱਟੀ ਉਹਦਾ ਵੀ ਸ਼ਾਇਦ ਜ਼ਿਕਰ ਆਵੇ ਉਹ ਭਗਤ ਨਾਮਦੇਵ ਜੀ ਨੇ ਕੀਤਾ ਉਹਨਾਂ ਦਾ ਹਾਂ ਗਿੱਲੀ ਗਿੱਲੀ ਰੋੜੜੀ ਕੱਢਦੀ ਕੱਢਦੀ ਆਈ ਆ ਗਈ ਐ ਜਨਮ ਚ ਆ ਗਈ ਹੁਣ ਅੱਖਾਂ ਜਨਮ ਚ ਆ ਗਈ ਜੋ ਬੈਠੇ ਸਿਰ ਤੇ ਖੜੇ ਨੇ ਉਸੇ ਤੇ ਖੜੇ ਨੇ ਥੱਲੇ ਨੂੰ ਤਾਂ ਝਾਕਦੇ ਨੇ ਉੱਪਰ ਨੂੰ ਨਹੀਂ ਜਾਣ ਦੀ ਕੋਸ਼ਿਸ਼ ਕਰਦੇ ਜਿਹੜੇ ਰੁਕ ਵੀ ਗਏ ਸਿਰਫ ਸਭ ਕੁਝ ਜਿਹੜੇ ਸਤੋਗੁਣੀ ਉਹ ਵੀ ਫਸ ਗਏ ਸਮਝੋ ਜੇ ਬੈਠੇ ਸਤੋਗੁਣੀ ਵਾਲੇ ਬੈਠੇ ਨੇ ਜੇ ਨਰਕ ਵੱਲ ਨਹੀਂ ਜਾਂਦੇ ਤਾਂ ਅੱਗੇ ਨੂੰ ਵੀ ਨਹੀਂ ਜਾਂਦੇ ਸੁਰਗ ਵੱਲੋਂ ਵੀ ਜਾਂਦੇ ਬੈਠੇ ਨੇ ਜੇ ਬੈਠੇ ਫਾਥਿਆਂ ਉਹ ਫਸ ਕੇ ਸਮਝੋਤੀ ਫਸੇ ਰਹਿ ਜਾਣਗੇ ਉਹ ਭਾਗ ਬਥਾਰੇ ਇੱਥੋਂ ਉੱਪਰ ਨਗੇ ਜਿਹਨਾਂ ਦੇ ਮਥੇ ਦੇ ਭਾਗ ਜਾਗਣਗੇ ਇੱਥੇ ਮਥੇ ਦੇ ਭਾਗ ਖਾਚਾ ਕਰਨਗੇ ਜਦ ਬੁੱਧੀ ਕੰਮ ਕਰੂਗੀ ਉਹਨਾਂ ਦੀ ਗੁਰਬਾਨੀ ਨੂੰ ਬੁੱਧੂਗੀ ਟੁੱਟ ਕੇ ਜੇ ਤਾਂ ਮੰਨਦੇ ਰਹੇ ਉਹ ਆਪਣੇ ਪਿਛਲੇ ਗੁਰੂਆਂ ਦਾ ਹੀ ਖਿਆਲ ਫਿਰ ਤਾਂ ਗਏ ਫਸ ਬੈਠੇ ਰਹੇ ਇਹ ਗੁਰਬਾਨੀ ਵਾਲੀ ਗੱਲ ਸੁਣ ਲਈ ਮੰਨ ਲਈ ਫੇਰ ਨਿਕਲ ਗਏ ਫੇਰ ਆ ਚਲੇ ਗਏ ਠੀਕ ਹੈ ਇਹ ਪ੍ਰੋਫੈਸਰ ਸਾਹਿਬ ਸਿੰਘ ਹੈ ਗਿੱਲੀ ਗਿੱਲੀ ਗੁੜ ਵਾਸਤੇ ਕਿਆ ਚਿਪਚਿਪ ਕਰਦੀ ਗੁੜ ਦੀ ਰੋੜੀ ਉੱਤੇ ਮੱਖੀ ਮੁਰਮੁਣ ਉੱਡ ਕੇ ਆ ਬੈਠਦੀ ਹੈ ਉਹ ਤਾਂ ਇੱਕ ਵਾਰ ਬੈਠ ਕੇ ਦੁਬਾਰਾ ਨਹੀਂ ਜਾਂਦੀ ਮੱਖੀ ਗਿੱਲੀ ਰੋੜੀ ਤੇ ਤਾਂ ਆਖਰ ਗੁੜ ਨਾਲ ਹੀ ਚੰਬੜ ਜਾਂਦੀ ਹੈ ਮੁਰਮੁਣ ਉੱਡ ਕੇ ਆ ਬੈਠਦੀ ਹੈ ਤੇ ਆਖਰ ਗੁਰ ਨਾਲ ਚੰਬੜ ਜਾਂਦੀ ਹੈ ਤੇ ਉੱਥੇ ਹੀ ਮਰ ਜਾਂਦੀ ਹੈ ਇਹੀ ਹਾਲ ਹੈ ਮਾਇਆ ਦਾ ਬੰਦੇ ਬਾਗ ਮਟਾਇਆ ਫਿਰ ਕੇ ਜਿਹੜੇ ਜਿਹੜੇ ਬੰਦੇ ਮਾਇਆ ਦੇ ਨੇੜੇ ਹੋ ਕੇ ਬੈਠਦੇ ਹਨ ਉਹ ਇਸ মোহ ਵਿੱਚ ਫਸ ਜਾਂਦੇ ਹਨ ਸਿਰਫ ਉਹ ਬਚਦੇ ਹਨ ਜਿਨ੍ਹਾਂ ਦੇ ਮੱਥੇ ਤੇ ਭਾਗ ਜਾਗਦੇ ਹਨ ਆਗ ਮਠਾਇਰੇ ਗੱਲ ਕੀ ਹੈ ਬੈਠੀ ਉਹ ਦੀਆਂ ਬੈਠੀ ਕਿਸ ਤਰੀਕੇ ਨਾਲ ਹੈ ਬੈਠਾ ਦਾ ਟੰਗ ਹੋਤੀ ਹੈ ਬੈਠੀਆਂ ਮੱਖੀਆਂ ਸਾਰੀਆਂ ਆਇਆ ਤਾਂ ਉਦਾਸੀ ਜਿਹੜੇ ਹੋ ਗਏ ਉਹ ਗੱਲ ਕਿੱਥੋਂ ਲਊ ਠੀਕ ਹੈ ਜੀ ਜੋ ਬੈਠੇ ਆ ਜੋ ਉੱਠੇ ਨਹੀਂ ਇਹ ਵੀ ਸੁਣ ਕੇ ਜਾਟ ਰੋਠ ਉਹ ਸਾਰੇ ਫਸ ਜਾਣਗੇ ਹਾਂ ਗੱਲ ਆ ਠੀਕ ਹੈ ਜੀ ਤੇ ਉਹ ਕਬੀਰ ਜੀ ਵੀ ਕਹਿੰਨੇ ਨਾ ਕਬੀਰ ਸੁੱਤਾ ਗਿਆ ਕਰੇ ਬਿਖਾਰਾ ਹੈ ਔਰ ਹਾਂਜੀ ਇਸ ਦੀ ਗੱਲ ਹੈ ਜੀ ਅਸਪਾ ਵੀ ਕਹਿੰਨੇ ਨੇ ਢਾੜ ਤੇ ਉਹਨੇ ਜੋਰ ਨਾਲ ਵਜਨ ਕਾ ਹਾਸਿਲ ਕੇ ਖੜਾ ਹੋ ਗਿਆ ਠੀਕ ਹੈ ਜੀ ਨੀਂਦ ਚ ਉਹ ਸੁੱਤੇ ਪਏ ਹਾਂ ਜੀ ਪਸੋ ਨਾ ਕੋਈ ਕਰਨਾ ਨਾ ਕੋਈ ਧਰਨਾ ੱਟਾ ਘੜਾਈ ਜਾਲੀਆਂ ਪਹਿਲੀਆਂ ਤੇ ਲੋਈ ਜਾਲੀਆਂ ਬੁਰਾ ਕਹਿਦਾ ਸੋਚਣਾ ਨਹੀਂ ਅਗਲ ਲੈਣੀ ਨਹੀਂ ਜਾਣ ਲੈਣਾ ਨਹੀਂ ਬੁਰਾ ਸੋਚਣਾ ਨਹੀਂ ਠੀਕ ਹੈ ਕਹੇ ਰਹਿ ਜਾਂਦਾ ਨਹੀਂ ਖੜਾ ਜਿੱਥੇ ਖੁੱਦ ਦੇ ਹਾਂਜੀ ਮਹੱਲਾ ਪੰਜਵਾਂ ਖਾਲੀ ਕੋਈ ਨਾ ਜਾਣੀਐ ਤੈ ਸਖੀ ਭਾਗ ਮਥਾਹੇ ਜਿੰਨੀ ਮੇਰਾ ਸੱਜਣ 라ਵਿਆ ਪਹਿਲਾ ਸ਼ਲੋਕ ਦੀ ਉਹਦਾ ਹੀ ਵਿਆਖਿਆ ਆ ਗਈ ਡਿੱਠਾ ਹੱਬ ਮਜਾਹੇ ਦੇ ਅੰਦਰ ਹੈ ਮੈਂ ਦੇਖ ਲਿਆ ਸਾਰਿਆਂ ਦੇ ਅੰਦਰ ਮੈਨੂੰ ਦਿਸਣਾ ਖਾਲੀ ਕੋਈ ਨਾ ਜਾਣੀਐ ਇਸਨੂੰ ਖਾਲੀ ਮਤ ਮੰਨੋ ਸਤਿਗੁਰ ਸਾਰਿਆਂ ਦੇ ਵਿੱਚ ਹੈ ਸਤਿਗੁਰ ਤੇ ਖਾਲੀ ਕੋਈ ਨਹੀਂ ਪਰ ਵੇਲ ਕੋਣ ਮਲਾਵੇ ਜਿਹੜੇ ਪ੍ਰਭ ਵੇਲ ਬੁਲਾਏ ਵੇਲ ਤਾਂ ਪ੍ਰਭ ਮਲਾਵੇ ਨਾ ਜੇ ਮਿਲਣਾ ਚਾਹੁੰਦਾ ਆਉਂਦਾ ਪ੍ਰਭ ਦੇ ਸਭ ਤਾਂ ਮੇਲ ਮਲਾਵੇ ਕਿ ਤਰਫ ਦੇ ਨੇੜੇ ਆਵੇ ਪ੍ਰਭ ਨੂੰ ਤਾਂ ਆਪਣਾ ਮਨ ਨਹੀਂ ਪ੍ਰਭ ਤਾਂ ਆਪੇ ਬਣਿਆ ਬੈਠਾ ਐ ਸਖੀ ਭਾਗ ਮਠਾਏ ਐ ਸਖੀਏ ਤੇਰੇ ਮੱਤੇ ਦੇ ਭਾਗ ਠੀਕ ਨੇ ਤੇਰੇ ਮੱਤੇ ਭਾਗ ਹੈ ਤੂੰ ਭਾਗਾ ਵਾਲੀ ਹੈ ਤੂੰ ਭਾਗੇ ਹੈ ਜਿੰਦੀ ਮੇਰਾ ਸੱਜਣ ਰਾਵਿਆ ਜਿੰਨੇ ਮੇਰਾ ਸੱਜਣ ਉਹਦਾ ਗਿਆਨ ਲੈ ਲਿਆ ਉਹਦੀ ਜੋਤ ਨਾਲ ਆਪਣਾ ਅੰਦਰ ਪ੍ਰਕਾਸ਼ ਲਿਆ ਆਪਣੇ ਹਿਰਦਾ ਪ੍ਰਕਾਸ਼ ਲਿਆ ਜੀ ਨੇ ਜੋਤ ਨਾਲ ਉਹ ਤੇ ਖੜ ਕੇ ਤੇਰੇ ਭਾਗ ਤੂੰ ਭਾਗਾ ਭਾਗੇ ਛਾਲੀ ਤੈਂ ਸਖੀ ਭਾਗ ਮਥਾਂ ਹੈ ਜਿੰਨੀ ਮੇਰਾ ਸੱਜਣ ਰਾਵਿਆ ਰਾਵਿਆ ਤੋਂ ਕੀ ਭਾਵ ਹੁੰਦਾ ਜੀ ਰਾਵਿਆ ਹੁੰਦਾ ਉਹਦੀ ਸਾਰੀ ਰੋਸ਼ਨੀ ਆਪਣੇ ਅੰਦਰ ਜਜ਼ਬ ਕਰ ਲੈਣੀ ਕਿਆਂ ਦੀ ਕਮੀ ਸੀ ਉਹ ਦੂਰ ਹੋ ਗਈਆਂ ਜੀ ਆਪਣੇ ਪਰਮ ਦਾ ਨਾਸ ਕਰ ਲੈਣ ਠੀਕ ਹੈ ਜੀ ਪੌੜੀ ਹੌ ਔਰ ਆਵੇ ਜਾਵੇ ਮੈਂ ਪਰਮੇਸ਼ਰ ਦੇ ਦਰ ਦਾ ਢਾਡੀ ਢਾਡੀ ਹੁੰਦਾ ਬੜਿਆਈ ਕਰਨ ਵਾਲਾ ਬਰਾਸੀ ਨੂੰ ਵੀ ਢਾਡੀ ਕਹਿੰਦੇ ਨੇ ਰਾਜਸਥਾਨ ਬਰਾਸੀ ਕੋਣਗਾਨ ਪਹਾੜ ਵੀ ਢਾਡੀ ਹੁੰਦੇ ਨੇ ਨੇ ਪਹਾੜ ਮੁਸਲਮਾਨ ਲੋਕੇ ਦਾ ਉੱਤੇ ਉਹਦੇ ਪਰਮੇਸ਼ਰ ਦੇ ਦਰ ਦੇ ਉੱਤੇ ਖੜਾ ਗੁਰੂ ਕਰਦਾ ਹੁੰਦਾ ਇਹ ਹਰ ਪਰ ਭਾਵੇ ਯਾਰ ਨੂੰ ਮੇਰੇ ਕੋਲ ਛੱਡੇ ਲੱਗ ਜਾਂਦਾ ਜੇ ਮੈਂ ਉਹਨੂੰ ਭਾਜਾਂ ਮੈਂ ਤਾਂ ਗੁਣ ਗਾਇਨ ਕਰਦਾ ਹਾਂ ਜੇ ਕਿਤੇ ਉਹ ਮੇਰੇ ਤੇ પ્રસન્ન ਹੋ ਜਵੇ ਵੀ ਹਾਂ ਗੁਣ ਤੇਰੇ ਠੀਕ ਨੇ ਤਾਂ ਮੇਰਾ ਕਲਿਆਣ ਹੋ ਜਵੇ ਮੈਂ ਭਗਵਾਨੀ ਹੋ ਜਾ ਮੇਰਾ ਥੇਰ ਥਾਵਰੀ ਮੇਰਾ ਹੈ ਹਰ ਵਕਤ ਥਾਵਰੀ ਥਾਂ ਵਾਲਾ ਉਹ ਦਰ ਘਰ ਵਾਲਾ ਆਪਣੇ ਘਰੋਂ ਹਿੱਲਦਾ ਨਹੀਂ ਉਹ ਮਹਿਲ ਵਿੱਚ ਰਹਿੰਦਾ ਮਹਿਲਦਾਰ ਹੈ ਮਹੱਲਕ ਚ ਦਾ ਮਤਲਬ ਇੱਕ ਹੋਰ ਵੀ ਹੁੰਦਾ ਜਿਹੜਾ ਹੱਲ ਦਾ ਨਹੀਂ। ਤੁਮਾ ਨੈਗੇਟਿਵ ਹੈ। ਹੱਲ ਦਾ ਜੋ ਹੱਲ ਹੈ ਮਹੱਲ ਨਹੀਂ ਹੱਲਦਾ ਜੋ ਡੋਲਦਾ ਵੀ ਡੋਲ ਹੈ ਉਹ। ਉਹ ਰੋੜਾ ਕੋਈ ਮੈਲ ਨਹੀਂ ਮਿੱਟੀ ਦਾ ਆਇਆ, ਦਾ ਇੱਟਾਂ ਨਾਲ ਬਣਿਆ ਹੋਇਆ। ਇਹ ਪੱਥਰ ਦਾ ਹੈ, ਸੋਲੇ ਦਾ ਨਹੀਂ ਬਣਿਆ ਹੋਇਆ। ਇਹ ਜੋ ਤੇ ਡੋਲ ਜੋ ਤੇ। ਫਿਰ ਥਾਬਰੀ। ਥਾਬਰੀ ਉਹ ਹੈ ਜੋ ਢੋਲ ਹੈ। ਔਰ ਆਵੇ ਜਾਵੇ ਹੋਰ ਤਾਂ ਉੱਣ ਨੇ ਸਭ ਕਦੇ ਇੱਥੇ ਕਦੇ ਉੱਥੇ ਕਦੇ ਰੁਕਦੇ ਜਾਂਦੀ ਹੈ ਹੋਰਾਂ ਦਾ ਬੁਲਡੋਲਦਾ ਰਹਿੰਦਾ ਇੱਕ ਫਾੜੀ ਟੰਗਿਆ ਹੋਇਆ ਹੁੰਦਾ ਆਵੇ ਜਾਵੇ ਹੋਰ ਕੌਣ ਹੋ ਜੀ ਇੱਕ ਤਾਂ ਪ੍ਰਭ ਹੋ ਗਿਆ ਪ੍ਰਭੁਤਵੀ ਦਾ ਨਾ ਹਿਰਦੇ ਦੇ ਦੀ ਗੱਲ ਕੌਣ ਹੋ ਰਹੀ ਹੈ ਹਿਰਦੇ ਨਹੀਂ ਬਣੇ ਹੋਏ ਅੱਛਾ ਜੀ ਉਹ ਫਿਰ ਆ ਜਾ ਰਹੇ ਹਨ ਦੂਏ ਥਿਰ ਥਿਰ ਹੋ ਗਏ ਚਾਹੇ ਉਹਨਾਂ ਨੇ ਬੁੱਤਲ ਬਣਾ ਲਈਆਂ ਜਾਇਓ ਗੁਰੂ ਬਣ ਗਏ ਪਰ ਪ੍ਰਭ ਨਾਲ ਆਪਣਾ ਨਾਲ ਇੱਕ ਬਿਕਦੀ ਹੋਏ ਆਪ ਦਾ ਪ੍ਰਭ ਬਣ ਗਏ ਹੋ ਤੇਤਾਰੀ ਪਰ ਆਪਣਾ ਪ੍ਰਭ ਤੋਂ ਵਾਂਝੇ ਨੇ ਜਿਹੜਾ ਪ੍ਰਭ ਸਿਰ ਥਾਬਰੀ ਤੋਂ ਵਾਂਝੇ ਨੇ ਉਹਦੀ ਉਹਦੇ ਬਾਰੇ ਗਿਆਨ ਹੀ ਜਾਣਦੇ ਜੀ ਠੀਕ ਹੈ ਜੀ ਸੋ ਮੰਗਾ ਦਾਨ ਗੁਸਾਈਆਂ ਜਿਤ ਭੁੱਖ ਲਹ ਜਾਵੇ ਪ੍ਰਭ ਜੀ ਉਹ ਦੇਵੋ ਦਰਸ਼ਨ ਆਪਣਾ ਜਿੱਦ ਢਾਡੀ ਤ੍ਰਿਪਤਾਵ ਹੈ। ਸੋ ਬੰਦਾ ਦਾਣ ਮੁਗਦਾ ਸਾਈਆਂ ਹੈ ਤੋਂ ਸਾਈਆਂ। ਮੈਂ ਤਾਂ ਉਹ ਦਾਣ ਮੁਗਦਾ ਟਿੱਟੇ ਜਿੱਦ ਭੁੱਖ ਲੈ ਜਾਵੇ ਮੇਰੀ ਭੁੱਖੇ ਨਾ ਰਹੇ ਕੋਈ। ਮਾਇਆ ਦੀ ਕੋਈ ਨਾ ਰਹੇ ਸੰਸਾਰ ਦੀ ਭੁੱਖ ਨਾ ਰਹੇ। ਸੰਸਾਰ ਦੀ ਭੁੱਖ ਵਿੜਾਈ ਨਹੀਂ ਸੰਸਾਰੀ ਵਿੜਾਈ ਦੀ ਭੁੱਖ ਸੰਸਾਰੀ ਰਾਜ ਦੀ ਭੁੱਖ ਸੰਸਾਰੀ ਪਦਾਰਥਾਂ ਦੀ ਭੁੱਖ ਇਹ ਸਭ ਦੂਰ ਹੋ ਜਵੇ। ਦਰਸ਼ਨ ਆਪਣਾ ਜਿੱਤੇ ਢਾਡੀ ਤ੍ਰਿਪਤਾਵ ਹੈ ਫੇ ਪ੍ਰਭ ਜੀ ਆਪਣਾ ਦਰਸਦੇ ਹੋ ਦਰਸ਼ਨ ਦੇਓ ਜਿਹਦੇ ਨਾਲ ਮੇਰਾ ਮਨ ਉਤਰਪੋ ਜਵੇ ਮੇਰੇ ਮਨ ਨੂੰ ਸ਼ਾਂਤੀ ਆ ਜਵੇ ਦੀ ਭੁੱਖ ਲੈ ਜਵੇ ਜੀ ਇਹ ਜਿਹੜਾ ਦਰਸ਼ਨ ਹੈ ਇਹ ਕਿਸ ਤਰ੍ਹਾਂ ਦਾ ਦਰਸ਼ਨ ਹੈ ਜੀ ਤੁਰਕ ਸ਼ਬਦ ਦਾ ਬੇਲ ਹੋ ਜਵੇ ਤੁਰਕੀ ਬਾਣੀ ਅੰਦਰ ਹਿਰਦੇ ਚ ਪ੍ਰਗਟ ਹੋ ਜਵੇ ਠੀਕ ਹੈ ਜੀ ਅਰਦਾਸ ਸੁਣੀ ਦਾਤਾਰ ਪ੍ਰਭ टाडी को महल बुलावै प्रभ देख्या दुख भूख गई टाडी को मंगण चित्त ना आवै हां अरली गाल सुन लो परवान हो गया टाडी अरदास सुनी दातार प्रब क्यों अरदास करनी थी सत संतोख दी अरदास थी और कुछ नहीं मंगया ਸੰਸਾਰ ਨਹੀਂ ਭੁੱਖ ਲੈ ਜਵੇ ਮੇਰੀ ਸੰਸਾਰ ਦਾ ਕੋਈ ਪਦਾਰਥ ਨਹੀਂ ਸੀ ਬੁੱਝ ਗਿਆ ਸੱਤ ਸੱਤ ਤੋਖਦੀ ਅਰਦਾਸ ਸੀ ਸੱਤ ਸੱਤ ਤੋਖ ਹੋਵੇ ਅਰਦਾਸ ਤਾਂ ਸੁਣ ਸੱਤ ਬਹਾਲੇ ਪਾਸ ਉਹ ਗੱਲ ਹੈ ਅਰਦਾਸ ਸੁਣੀ ਦਾਤਾਰ ਪ੍ਰਭ ਇਹ ਅਰਦਾਸ ਸੁਣਦਾ ਦੂਜੀ ਅਰਦਾਸ ਨਾ ਕਦੀ ਸੁਣੀਆਂ ਨਾ ਸੁਰੇ ਢਾਡੀ ਕੋ ਮੈਲ ਬੁਲਾਵਾ ਢਾਡੀ ਨੂੰ ਕਹਿੰਦਾ ਆ ਜਾ ਸਰਵੜਿਆ ਦਰਵਾਜੇ ਮੂਹਰੇ ਖੜਾ ਸੀ ਨਾ ਢਾਡੀ ਦਾ ਦਰਵਾਜੇ ਮੂਹਰੇ ਹੀ ਖੜਾ ਸੀ ਕਹਾਂ ਆ ਜੁਗਿਆ ਅੰਦਰ ਆਇਆ ਮਨ ਬੁਲਾਵਾ ਪ੍ਰਭ ਦੇਖਿਆ ਜਾ ਅੰਦਰ ਗਿਆ ਫਿਰ ਪ੍ਰਭ ਦਾ ਦਰਸ਼ਨ ਹੋਇਆ ਪ੍ਰਭ ਹੋ ਗਿਆ ਦੇਖਦੀ ਸਾਰੇ ਬੁੰਦਣਾ ਵੀ ਭੁੱਲ ਗਿਆ ਕੀ ਮੰਗਾ ਕੀ ਨਾਮ ਮੰਗਾ ਜੇਤਾ ਹੀ ਭੁਲ ਗਦੇ ਗਿਆ ਐਸਾ ਗਿਆਸ ਹੋਇਆ ਨਾਨਕ ਭਗਤਾ ਸਦਾ ਬਗਵਾ ਦੁਨੀਆ ਦੁਖ ਪਾਪ ਦਾ ਰਾਤ ਦੁਖ ਵਰ ਪਾਪ ਦਾ ਹੀ ਨਾਸ ਹੋ ਗਿਆ ਗੁੰਗਣਾ ਨਹੀਂ ਬੁੱਲ ਗਿਆ ਗੁੰਗਣੀ ਲੋੜ ਨਹੀਂ ਰਹੀ ਕਿਨ ਤੋਂ ਦਹੋਰ ਗਿਆ ਗੁੰਗਣਾ ਚਰ ਤੋਂ ਖਾਂ ਕੇ ਦੁਖ ਜਾਂ ਮਿਲ ਗਿਆ ਤੇ ਗੁੰਗਣਾ ਹੋਰ ਰਹਿ ਕੀ ਗਿਆ ਮਾਣਾ ਜਿੱਤਾ ਇਤਨੇ ਗਾੜੀ ਹੁੰਦਾ ਹੀ ਜਾਂਦਾ ਜਦੋਂ ਇੱਕ ਉਹ ਮੇਰੀ ਪਾਣੀ ਸਟਗੁਰਦੀ ਹੈ ਆਪਾ ਤਾਂ ਤੋਂ ਪਰੇ ਫਿਰਦੇ ਹਾਂ ਅਚਰ ਬੁੱਦੀ ਗੱਲ ਪਿੱਛੇ ਹੀ ਖਤਮ ਹੋ ਗਈ ਬਹੁਤ ਠੀਕ ਹੈ ਇੱਥੇ ਹੁਣ ਆ ਸ਼ਬਦ ਗੁਰੂ ਦੀ ਗੱਲ ਹੋ ਰਹੀ ਹੈ ਜੀ ਆ ਸ਼ਬਦ ਗੁਰੂ ਮਹਲ ਬਲਾ ਬਹਲ ਦੇ ਵਿੱਚ ਹੋਈ ਹੈ ਮਹਲ ਸਾਜਗਰ ਮਹਲ ਸਾਜਗਰ ਤੇ ਬਲਾ ਲਿਆ ਬਰਾਲਿਆ ਧੁਰ ਹੁਣ ਪ੍ਰਭ ਦਾ ਪ੍ਰਭ ਹੈ ਅੱਗੇ ਹੈ ਜੀ ਆ ਪ੍ਰਭ ਦਾ ਪ੍ਰਭ ਹੈ ਬਾਣੀ ਜੋ ਤੇ ਜੋ ਉਗਮੋਂ ਤੇ ਥਾਈ ਸੁਰ ਗਿਆ ਦੇਖ ਲਿਆ ਸਭ ਕੁਝ ਚਲਦਾ ਸੀ ਅੱਦਰ ਠੀਕ ਹੈ ਜੀ ਸਭੇ ਇੱਛਾ ਪੂਰੀਆਂ ਲਗ ਪ੍ਰਭ ਕੈ ਪਾਵੇਂ ਹਾਂ ਨਿਰਗੁਣ ਢਾਡੀ ਬਖਸ਼ਿਓਨ ਪ੍ਰਭ ਪੁਰਖ ਵਿਦਾਵੈ ਸਭੇ ਇੱਥਾ ਪੂਰੀਆਂ ਸਾਰੀਆਂ ਇੱਥਾ ਪਹਿਲਾਂ ਆਪੇ ਪੂਰੀਆਂ ਹੋ ਗਈਆਂ ਉੱਗਣ ਦੀ ਲੋੜ ਨਹੀਂ ਲੱਗੀ ਕੁਝ ਪ੍ਰਭ ਦੇ ਚੜ੍ਹਨੀ ਲੱਗਦੀ ਸਾਰ ਪੂਰੀਆਂ ਹੋ ਗਈਆਂ ਸੁਰਤਿ ਖਬਰ ਨਾਲ ਛੁੜੀ ਸਭ ਇੱਥੇ ਪੂਰੀਓ ਹਾਂ ਨਿਰਗੁਣ ਢਾਡੀ ਦੇਖੋ ਮੇਰਗੋਣਾ ਨਾ ਢਾਡੀ ਸਰਗੋਣੀ ਹੈ ਢਰਗੋਣਾ ਨਿਰਗੁਣ ਹੈ ਢਾਡੀ ਸਰੀਰ ਨਹੀਂ ਹੈ ਢਰਗੋਣਾ ਕੌਣ ਹੈ ਸਰਗੋੜ ਨਾਲ ਜੁੜਿਆ ਹੋਇਆ ਹੈ ਢਾਡੀ ਢਿਰਗੋੜ ਸਰਗੋੜ ਦੇ ਲੜ ਲੱਗੇ ਹੈ ਸਰਗੋੜ ਦਾ ਦਰਸ਼ਨ ਹੋਇਆ ਬੇਦਾਵਾ ਜਿਹਦੇ ਖਿਲਾਫ ਕੋਈ ਦਾਵਾ ਹੀ ਕਰ ਸਕਦਾ ਜਿਹਦੇ ਖਿਲਾਫ ਕੋਈ ਬੋਲ ਨਹੀਂ ਸਕਦਾ ਜਿਹਨੂੰ ਕੋਈ ਚੈਲੇਂਜ ਨਹੀਂ ਕਰ ਸਕਦਾ ਉਸ ਪੁਰਖ ਨੇ ਬਖਸ਼ਿਆ ਪੁਰਖ ਬੇਦਾਵਾ ਨਾ ਆਪਦਾ ਦਾ ਕਰਦਾ ਕੋਈ ਨਾ ਉਹਦੇ ਖਿਲਾਫ ਕੋਈ ਦਾਵਾ ਕਰਦਾ। ਕੋਈ ਕੁਝ مخالਫਤ ਕਰਦਾ। ਕੋਈ ਉਹ ਕੋਈ ਗੋਡ ਕਹਿੰਦਾ ਕੋਈ ਉਹਨੂੰ, ਅੱਲਾ ਕਹਿੰਦਾ ਕੋਈ ਉਹਨੂੰ, ਖੁਦਾ ਕਹਿੰਦਾ ਕੋਈ ਉਹਨੂੰ, ਰਾਮ ਕਹਿੰਦਾ ਕੋਈ ਉਹਨੂੰ, ਸ਼ਿਵੂ ਕਹਿੰਦਾ ਕੋਈ, ਪੁਰਸ਼ਵ ਕਹਿੰਦਾ ਕੋਈ ਉਹਨੂੰ, ਕੁਝ ਵੀ ਕਹਿੰਦਾ ਰਹੇ। ਪ੍ਰੀਕਤ ਕੋਈ ਨਹੀਂ ਕਰਦਾ। ਰਾਇਸਰ ਸਾਹਿਬ ਜੀ ਨੇ ਇੱਥੇ ਲਿਖਿਆ ਜੀ, ਪ੍ਰਭ ਦੀ ਚਰਣੀ ਲਾ ਕੇ ਮੇਰੀਆਂ ਸਾਰੀਆਂ ਹੀ ਕਾਮਨਾਵਾਂ ਪੂਰੀਆਂ ਹੋ ਗਈਆਂ, ਮੇਰੀ ਕੋਈ ਵਾਸਨਾ ਹਰੈ ਹੀ ਨਹੀਂ ਗਈ ਉਸ ਪ੍ਰਭੂਪੁਰਖ ਨੇ ਮੈਨੂੰ ਨਿਮਾਣੇ ਗੁਣਹੀਨ ਢਾਡੀ ਨੂੰ ਬਖਸ਼ ਲਿਆ ਹੈ ਉਹ ਬੇਦਾਵੇ ਨੂੰ ਨਿਮਾਣਾ ਕਹਿੰਦੇ ਆ ਜੀ ਬੇਦਾਵਾ ਵਿਧਵਾ ਨਹੀਂ ਹੁੰਦਾ ਮਿਰਦਾਵਾ ਲਿਖਿਆ ਹੋਇਆ ਹੈ ਕਬੀਰ ਦੇ ਮਿਰਦਾਵੇ ਨਿਰਦਾਵੇ ਰਹੁ ਕੋਈ ਦਾਵਾ ਕਰਕੇ ਨਾਰੈਣਾ ਦੇਰਦਾਵੇ ਰਹਿਣ। ਕੋਈ ਬਸ਼ਰੀਕ ਨਹੀਂ ਬਣ ਸਕਦਾ ਉਹਨਾਂ। ਕਿਉਂ ਨਹੀਂ ਬਣ ਸਕਦਾ? ਪ੍ਰਹਾਰੀ ਵੀ ਹੈ। ਉਹਦੇ ਨਾਲ ਨਿਰਦਾਵੇ ਆਊਗਾ। ਜਿਹੜਾ ਦਾਵਾ ਕਰਦਾ ਹੈ ਉਹਦੇ ਤੇ ਫਰਹਾੜ ਵੀ ਕਰ ਦਿੰਦਾ ਹੈ, ਨਰਕ ਜੀਂ ਭੇਜ ਦਿੰਦਾ ਹੈ। ਉਹਦੇ ਸ਼ਕਤੀ ਵੀ ਹੈ, 파ਬਰ ਦਾ ਵੀ ਇਸਤੇਮਾਲ ਕਰ ਲੈਂਦਾ। ਪ੍ਰਭਪੁਰਖ ਤੇ ਸਿਹਾਰੀ ਹੈ। ਇਹਨਾਂ ਨੇ ਪ੍ਰਭਪੁਰਖ ਨੇ ਤਾਂ ਕਹਿਤਾ ਵੇਦਾਵੇ ਦਾ ਮਤਲਬ ਨਿਮਾਣਾ ਕਿਵੇਂ ਹੋ ਜੂ ਪ੍ਰਭਪੁਰਖ ਦਾ ਸਭ ਤੋਂ ਵੱਡਾ ਪ੍ਰਭਪੁਰਖ ਵਿਦਾਵ ਹੈ ਇਹ ਵਿਦਾਵ ਹੈ ਜਿਹੜਾ ਹੈ ਇਹ ਵਿਸ਼ੇਸ਼ਣ ਲੱਗਦਾ ਜੀ ਤਾਂ ਹੀ ਫਿਰ ਉਸ ਪ੍ਰਭਪੁਰਖ ਨੇ ਬਖਸ਼ ਲਿਆ ਹੈ ਅਰਥ ਠੀਕ ਨਹੀਂ ਲੱਗਦੇ ਜਿਹੜਾ ਵਿਦਾਵ ਹੈ ਰੂਪੀ ਪ੍ਰਭਪੁਰਖ ਹੈ ਉਹਨੇ ਬਖਸ਼ ਲਿਆ ਜਿਹਦੇ ਖਿਲਾਫ ਜਿਹਦੇ ਖਿਲਾਫ ਕੋਈ ਦਾਵਾ ਨਹੀਂ ਕਰ ਸਕਦਾ ਆ ਉਹ ਤੇ ਨਿਮਾਣੇ ਦੀ ਕੀ ਲੋੜ ਠੀਕ ਹੈ ਇਹ ਪ੍ਰਭ ਦਾ ਗੁਣਵਾਚਕ ਨਾਮ ਹੈ ਵਿਦਾਵਾ ਹੈ ਜੀ ਵਾਹੇ ਗੁਣਵਾਚਕ ਉਹਦਾ ਕੋਈ ਸ਼ਰੀਰ ਨਹੀਂ ਹੈ ਸਿਰਫ ਠੀਕ ਹੈ ਪਰ ਉਹ ਐ ਕਹਿੰਦਾ ਮੇਰੇ ਵਰਗਾ ਕੋਈ ਹੈ ਨਹੀਂ ਇਹ ਦਾਵਾ ਦਾਵਾ ਕਰਦਾ ਉਹ ਕਿਸੇ ਤਰ੍ਹਾਂ ਦਾ ਕਿ ਮੇਰਾ ਇਲਾਜ ਚੱਲਦਾ ਤੂੰ ਕਿਉਂ ਕਰਦਾ ਹੈ ਨਾ ਹੈ ਉਹ ਠੀਕ ਹੈ ਜੀ ਉਹ ਸੰਸਾਰ ਨਾਲ ਦਿੱਤਾ ਹੋਇਆ ਉਹਦਾ ਸੰਸਾਰ ਨਾਲ ਰਿਸ਼ਤਾ ਹੈ ਵੀ ਹੈ ਵੀ ਨਹੀਂ ਜਿਵੇਂ ਪੇਦਾਵਾ ਲਿਖ ਕੇ ਦੇ ਜੇ ਸਿੱਖ ਇੱਥੇ ਨੌਵੀਂ ਪੜ੍ਹਦੀ ਸਮਾਪਤੀ ਹੈ ਜੀ